دکھنے محلہ پنجمہ دیکھن کو مشتاق نوکھ کجےہا تو تنی پھردا کیتا ہے حال جا ڈٹھم تا من تراپیا دیکھن اے مالک ਤੇਰਾ মুখ کہیا گیا سارے ہی مشتاق نے دیکھن دے سارے چپنے چپنے دیکھن دے تیرے درشں دے چپ سارے ہی نے کوئی نہیں نا چاہندا ہوے جڑا تیرا درشں کر دو کہیا جا تیرا মুখڑا نو دیکھنوں سارے ہی مشتاق نے پھردا کیتا ہے حال جا ڈٹھم تاں من پراپیا جڑے حال کہ ہے جیवस्था چونے دا کہیا جا تیرا حال ہو گا جڈ ٹم تاما ترا پیا جا دیکھ لیا جے تے کوئی سمجھ ائی گا تو ایتا ہے حال چے اے ਗੁਣਾ دے وچ دے جڑے لوک اونوں دین دے کسے دا چنگا حال ہے کسے دا برا حال ਕਿਸੇ ਦਾ ਵਿਚਾਰਲਾ ਹਾਲ ਹੈ ਨਾ ਕਿੰਦਾ ਰੁਗੜਾ ਉਹ ਜਿਹੜਾ ਚੌਥਾ ਹੈ ਉਹਦੀ ਅਦਾਨਤਿਕ ਭਕਤਾ ਸਦਾ ਵਿਗਾਸ ਸਦਾ ਵਿਗਾਸਾ ਦਾ ਹਾਲ ਹੈ ਉਹ ਵੀ ਮਾੜੇ ਹਾਲ ਚ ਫਿਰਦਾ ਫਿਰਦਾ ਕਿੱਤੇ ਹਾਲ ਉਹ ਕਹਿ ਦਿੰਦੇ ਨੇ ਨਾ ਬੱਚੋ ਤੁਸੀਂ ਦਾਸ ਕਹਿੰਦੇ ਸਭ ਤੋਂ ਬਲੀਏ ਨਾ ਜਾਣੇ ਕਿਸ ਬੇਸਮੇਂ ਆ ਰਹਿਣ ਮਿਲ ਜਾਏ ਜਿੱਥੇ ਦੀ ਜੰਮਾਲੀਆਂ ਨੇ ਉੱਥੇ ਉੱਥੇ ਕਹਿ ਦਿੰਦਾ ਠੀਕ ਹੈ ਹਾਂ ਨੀਚਾ ਅੰਦਰ ਨੀਚ ਜਾਤ ਨੀਚੀ ਹੂ ਅਤ ਨੀਚ ਕੋਈ ਕੁਛ ਕਹਿ ਉਹ ਨਾ ਕੋਈ ਕੁਛ ਕਹਿ ਦਿੰਦਾ ਉਹ ਉਹਨਾਂ ਦਾ ਲੁਕਿਆ ਦੇਖੇ ਤੋਂ ਹੀ ਪਤਾ ਲੱਗਦਾ ਪਹਿਲਾਂ ਨਹੀਂ ਹਾਂਜੀ ਪਹਿਲਾਂ ਅੱਛਾ ਇਹ ਤਾਂ ਨਹੀਂ ਵੀ ਲਿਖਿਆ ਉਹਨਾਂ ਨੇ ਆਈ ਵਾਉਂਡਰ ਅਰਾਊਂਡ ਇਨ ਸੱਚੇ ਵੀ ਮੈਂ ਕਿਸ ਹਾਲ ਚ ਫਿਰ ਰਹੇ ਹਾਂ ਮੈਂ ਤੈਨੂੰ ਦੇਖ ਲਿਆ ਉਸ ਤੋਂ ਬਾਅਦ ਮੇਰਾ ਮਨ ਜਿਹੜਾ ਹੈਗਾ ਸ਼ਾਂਤੀ ਚ ਆ ਗਿਆ ਐਨੀ ਹੈ ਗੱਲ ਓਹੋ ਕਿਸ ਹਾਲ ਚ ਤੂੰ ਐ ਕਿਹ ਵੀ ਹਾਲ ਐ ਉਹਦਾ ਸੰਤਨ ਦੁੱਖ ਪਾਏ ਤੇ ਦੁਖੀ ਹਨਾ ਵੀ ਸੰਤਨਾਂ ਨੂੰ ਦੁੱਖ ਨਹੀਂ ਲੱਗਦਾ ਪਰ ਮਹੇਸ਼ਰ ਵੀ ਦੁਖੀ ਹੋ ਪਰਮੇਸ਼ਰ ਦੀ ਕਾਹਨੂੰ ਗੱਲ ਐ ਇੱਥੇ ਇੱਥੇ ਤਾਂ ਅੰਤਰਾਤਮਾ ਦੀ ਗੱਲ ਐ ਜੇ ਨੂੰ ਦੁੱਖ ਲੱਗਦਾ ਸਭ ਨੇ ਬੰਦੁਖੀ ਹੁੰਦਾ ਪਾਸ਼ਾ ਦੀ ਕੀਰਤ ਦੀ ਹੋਈ ਸੀ ਤਾਂ ਬਹੁਤਿਆਂ ਨੇ ਬੰਦੁਖੀ ਹੋਗੇ ਸੀ ਅੰਤਰਾਤਮਾ ਦੁਖੀ ਹੋਗੀ ਸੀ ਸੰਤਰਾਤਮਾ ਕਰਕੇ ਦੁਨੀਆਂ ਜਿਹੜੇ ਵਿਰੋਧੀ ਸੀ ਉਹ ਵੀ ਦੁਖੀ ਹੋਗੇ ਇਹ ਹੋਏ ਜੀਆਂ ਗੱਲਾਂ ਨੇ ਕੁਝ ਅੱਛਾ ਜੀ ਪਰ ਫਿਰਦਾ ਕਿਤੇ ਹਾਲ ਹੈ ਇਹ ਮੂਲਯੋ ਗੱਲ ਹੈ ਉਹ ਹਕੂਮਤ ਦੀ ਹੈ ਸਾਜਗਰਨ ਦੀ ਹਾਲ ਹੈ ਉਹਦਾ ਹਾਲ ਉਹਦਾ ਹਾਲ ਤਾਂ ਖੜਿਆ ਹੋਇਆ ਲੱਗਦਾ ਉਹਦਾ ਨਹੀਂ ਹਾਲ ਫਰਕ ਪੈਂਦਾ ਉਹ ਤੇ ਫਰਕ ਪੈਂਦਾ ਉਹਨਾਂ ਦੇ ਹੱਥ ਵਿੱਚ ਹੈ ਸਭ ਅੱਛਾ ਇਹ ਜਦੋਂ ਮਿਲਿਆ ਤਾਂ ਪਤਾ ਲੱਗਿਆ ਕਿ ਨਾਨਕ ਭਗਤ ਸਦਾ ਵਗਾਸ ਹੈ ਹੱਸਦਾ ਮਿਲਿਆ ਫਿਰ ਕੀ ਗੇ ਦੁਨੀਆ ਚ ਬਿਹਾਲ ਨੇ ਲੋਕ ਉੱਥੇ ਤਾਂ ਸਭ ਦਾ ਹਾਲ ਖੜਿਆ ਹੋਇਆ ਹੀ ਆ ਹਾਂ ਹਾਂਜੀ ਮਹੱਲਾ ਪੰਜਵਾਂ ਦੁਖੀਆ ਦਰਦ ਕਣੇ ਵੇਦਨ ਜਾਣੇ ਤੂੰ ਧਣੀ ਜਾਣਾ ਲੱਖ ਭਵੇ ਪਰੀ ਦਿਖੰਦੋ ਤਾਂ ਜੀਵਸਾ ਦੁਖਿਆਂ ਵੇਦਨ ਜਾਣੇ ਤੂੰ ਤੇ ਤੂੰ ਸਾਰਿਆਂ ਦੀ ਪੀੜਾ ਜਾਣਦਾ ਹੈ ਪਰ ਤੇਨੂੰ ਸਾਰਿਆਂ ਦਾ ਗਿਆਨ ਹੈ ਕੌਣ ਦੁਖੀ ਹੈ ਕੌਣ ਦਰਦਵੰਦ ਹੈ ਤੂੰ ਬਾਖਬਰ ਹੈ ਬੇਖਬਰ ਨਹੀਂ ਕਿਸੇ ਤੂੰ ਸਾਰਾ ਪਤਾ ਤੱਕ ਹਾਂ ਜਾਣਾ ਲੱਖ ਭਵੇਂ ਪੀੜੀ ਦਿਖੰਦੋ ਤਾਂ ਜੀਵ ਸਾਂ ਜਾਣਾ ਲੱਖ ਭਵੇਂ ਭਾਵੇਂ ਮੈਂ ਲੱਖ ਵਾਰ ਜਾਣਦਾ ਹਾਂ ਪਰ ਨਹੀਂ ਦਿਖੰਦੋ ਤਾਂ ਜੀਵ ਸਾਂ ਭਾਵੇਂ ਮੈਨੂੰ ਪਤਾ ਹੈ ਕਿ ਉਹ ਜਾਣਦਾ ਦਰਦ ਸਭ ਦੇ ਉਹ ਤਾਂ ਕੁਝ ਨਹੀਂ ਭੁੱਲਿਆ ਹੋਇਆ ਪਰ ਫੇਰ ਵੀ ਜਿੰਨਾ ਚਿਰ ਮੈਨੂੰ ਦਿਸ ਨਹੀਂ ਜਾਂਦਾ ਮੈਨੂੰ ਦਰਸ਼ਨ ਨਹੀਂ ਹੋ ਜਾਂਦਾ ਉਹਨਾਂ ਚਿਰ ਮੈਂ ਜੀਵਨ ਮੇਰਾ ਚੱਲ ਨਹੀਂ ਸਕਦਾ ਮੈਂ ਜਿਉਂਦਾ ਨਹੀਂ ਰਹਿ ਸਕਦਾ ਉਹ ਵਿਛੜ ਕੇ ਮੈਂ ਜਿਉਂਦਾ ਨਹੀਂ ਰਹਿ ਸਕਦਾ ਸਿਰਫ ਇੰਨੀ ਗੱਲ ਤੇ ਧਰਵਾਸ ਕਰਕੇ ਜਿਉਂਦਾ ਨਹੀਂ ਰਹਿ ਸਕਦਾ ਕਿ ਉਹ ਸਾਰਿਆਂ ਦਾ ਉਹ ਜਾਣੀ ਜਾਣ ਹੈ ਸਾਰਿਆਂ ਦੇ ਦੁੱਖ ਜਾਣਦਾ ਇੰਨੀ ਗੱਲ ਨਾਲ ਮੇਰਾ ਮਨ ਨਹੀਂ ਖੇੜ ਸਕਦਾ ਮੈਂ ਇਦੋਂ ਗਾਹਾਂ ਜਾਣਾ ਚਾਹੁੰਨਾ ਉਦੇ ਦਰਸ਼ਨ ਤੱਕ ਜਾਣਾ ਚਾਹਣਾ ਉਦੋਂ ਕੱਟ ਮੇਰਾ ਦਰਸ਼ਨ ਦੇ ਨਾਲ ਹੈ ਜੀਵਨ ਚੱਲੂਗਾ ਜਿਨੇ ਦਰਸ਼ਨ ਨੇ ਜੰਮਣ ਮਰਨ ਬੜਿਆ ਰਹੂਗਾ ਠੀਕ ਹੈ ਜਾਣਾ ਲੱਖ ਭਵੇਂ ਤਾਂ ਮਤਲਬ ਇਹ ਨਹੀਂ ਕਿ ਮੈਂ ਹਜਾ ਲੱਖਾਂ ਤਰ੍ਹਾਂ ਦੇ ਚਾਹੇ ਇਲਾਜ ਜਾਣਦਾ ਹੋਵਾਂ ਨਾ ਨਾ ਨਾ ਭਾਵੇਂ ਮੈਂ ਲੱਖ ਇਸ ਗੱਲ ਨੂੰ ਜਾਣਦਾ ਅੱਛਾ ਜੀ 락 ਕੋਰ ਜਾਂਦਾ ਦੁਨੀਆ ਜਾਣਦੀ ਹੈ ਇੱਥੇ ਹੀ ਧਰਵਾਸ ਕਰ ਲੈਂਦੀ ਹੈ ਉਹ ਤਾਂ ਜੀ ساری ਜਗ੍ਹਾ ਹੈ ਜੀ ਦਖੰਦਰ ਤਾਂ ਜੀ ਸੀ ਮੇਰਾ ਜੀਵਨ ਤਾਂ ਉਹਦੇ ਦਰਸ਼ਨ ਨਾਲ ਹੈ ਮੈਂ ਇੱਥੇ ਨਹੀਂ ਖੜ ਸਕਦਾ ਇਹਦੇ ਨਾਲ ਧਰਵਾਸ ਮੈਨੂੰ ਨਹੀਂ ਆਉਂਦਾ ਲੋਕਾਂ ਨੂੰ ਉਹਦਾ ਹੋਊਗਾ ਲੋਕ ਇਸ ਗੱਲ ਤੇ ਧਰਵਾਸ ਕਰਕੇ ਕਿ ਸਭ ਦੇ ਅੰਦਰ ਵੀ ਜਾਣਦਾ ਉਹ ਧਰਵਾਸ ਕਰਕੇ ਜੀ ਜਿਉ ਲੈਣ ਪਰ ਮੇਰਾ ਸਾਡ ਜੀਵਨ ਜਿਹੜਾ ਹੈਗਾ ਉਹ ਉਹਦੇ ਦਰਸ਼ਨ ਨਾਲ ਜੁੜਿਆ ਹੋਇਆ ਠੀਕ ਹੈ ਪਰ ਇਹ ਕੌਣ ਕਿਹਨੂੰ ਰਿਹਾ ਜੀ ਆ ਸਤਗੁਰ ਹੁਕਮ ਨੂੰ ਕਹਿ ਰਿਹਾ ਸਤਗੁਰ ਨੇ ਜਨਮ ਦੇਖੋ ਨਾ ਉਹਦੇ ਦਰਸ਼ਨ ਬਿਨਾ ਜਨਮ ਨਹੀਂ ਹੋਣਾ ਜਨਮ ਪਦਾਰਥ ਲੈਣਾ ਸਤਗੁਰ ਕੇ ਜਨਮ ਹੈ কবর ਮਟਾਇਆ ਦਰਸ਼ਨ ਦੇ ਨਾਲ ਦਰਸ਼ਨ ਦੇਖ ਜੀਵਨ ਗੁਰ ਤੇਰਾ ਬੋਲਦਾ ਸਰਜੀਵਰ ਨਹੀਂ ਹੈਗਾ। ਇਹ। ਵਿਖੰਡੋ ਦੇਖਣ ਸਾਰੇ ਜਿਹੜਾ ਜਦ ਪਦਾਰਥ ਮਿਲ ਜਾਣਾ। ਅੱਛਾ ਜੀ। ਇਹ ਫਿਰ ਸਤਿਗੁਰ ਹੁਣ ਅੱਗੇ ਅਰਦਾਸਾ ਕਰ ਰਹੇ ਜੀ। ਇਹ ਗੁਰੂ ਦਾ ਦਰਸ਼ਨ ਚਾਹੀਦਾ ਮੈਨੂੰ। ਅੱਛਾ ਜੀ। ਹਾਂ ਮਹੱਲਾ ਪੰਜਵਾਂ ਢੈਂਦੀ ਜਾਏ ਕਰਾਰ ਵਹਿਣ ਵਹੰਦੇ ਮੈਂ ਡਿਠਿਆ ਸੇਹੀ ਰਹੇ ਅਮਾਨ ਜਿੰਨਾ ਸਤਿਗੁਰ ਭੇਟਿਆ। ਕਹਿੰਦੀ ਜਾਇਕਰਾਰ ਖਰਾਰ ਕਰਕੇ ਚੱਲੇ ਤੇ ਬੰਨ ਨੂੰ ਤਕੜਾ ਕਰਕੇ ਚੱਲੇ ਸੀ ਬਹਿਣ ਬੰਦੇ ਮੈਂ ਜਿਠਿਆ ਬਹਿਣ ਦੇ ਵਿੱਚ ਬਹਿੰਦੇ ਗਏ ਬਹੁਤ سارے ਲੋਕ ਬਿਨਾ ਦੇਖੇ ਤੇ ਮੈਂ ਦੇਖੇ ਨੇ ਇਸ ਬਹਿਣ ਵਿੱਚ ਬਹਿ ਕੇ ਦਰਸ਼ਨ ਨਹੀਂ ਹੋਇਆ ਚੱਲੇ ਸੀ ਕਰਾਰ ਕਰਕੇ ਦਰਸ਼ਨ ਨੂੰ ਪਰ ਬਹਿ ਗਏ ਬੇਤਾਰਦੀ ਨਦੀ ਵਿੱਚ ਦਰਸ਼ਨ ਨਹੀਂ ਹੋ ਸਕਿਆ ਸਹੀ ਰਹੇ ਅਮਾਨ ਬਤੇ ਕੋਣ ਨੇ ਅਮਾਨ ਉਹ ਜਿਹੜੇ ਹੰਕਾਰ ਤਿਆਗ ਗਏ ਮੋਹ ਛੱਡ ਗਏ ਜਿਹਨਾਂ ਨੂੰ ਮਾਨ ਹੋ ਗਿਆ ਉਹ ਬਹਿ ਗਏ ਜਿਹੜੇ ਹੰਕਾਰ ਛੱਡ ਗਏ ਜਿਨ੍ਹਾਂ ਸਤਗੁਰੂ ਮਿਲਿਆ ਜਿਨ੍ਹਾਂ ਨੂੰ ਸਤਗੁਰੂ ਮਿਲ ਗਿਆ ਉਹਨੇ ਉਹਨਾਂ ਦਾ ਹੰਕਾਰ ਛਿਡਾਤਾ ਉਹ ਬਚੇ ਨੇ ਤੁਸੀਂ ਜਿਹੜੀ ਬੇਤਲਦੀ ਨਦੀ ਹੈ ਨਾ ਕਲਪਨਾ ਦੀ ਕਾਲੀ ਧਾਰ ਉਹ ਸਾਰੇ ਬਹਿ ਗਏ ਸਾਰੇ ਡੁੱਬ ਗਏ ਠੀਕ ਹੈ ਜੀ ਸਹੀ ਰਹੇ ਅਮਾਨ ਜਿਨਾ ਸਤਗੁਰੂ ਭੇਟਿਆ ਮਾਨ ਤੋਂ ਰਹਿਤ ਰਹਿ ਗਏ ਮਾਨ ਤੋਂ ਰਹਿਤ ਹੋ ਕੇ ਬਚ ਗਏ ਠੀਕ ਹੈ ਪਰ ਇਹ ਹੁਣ ਇੱਥੇ ਮਨ ਨੇ ਪੇਚਣਾ ਸੀ ਸਤਗੁਰੂ ਨੂੰ ਮਨ ਬੁੱਧੀ ਨੇ ਆਹ ਮਨ ਬੁੱਧੀ ਨੇ ਪੇਚ ਗੁਰੂ ਬਣ ਗਿਆ ਮੈਂ ਬਹੁਤ ਬੜਾ ਬਣ ਗਿਆ ਮੇਰੇ ਬਹੁਤ ਚੇਲੇ ਵੀ ਡੁੱਬ ਗਏ ਮੇਰੇ ਇੰਨੇ ਆਸ਼ਰਮ ਨੇ ਇੰਨੇ ਲੋਕ ਮਨ ਨੂੰ ਬੰਦੇ ਡੁੱਬ ਗਏ ਮੇਰੀ ਗੱਲ ਕਿੰਨੇ ਲੋਕ ਸੁਣਦੇ ਨੇ ਮੇਰੀ ਮਗਰ ਕਿੰਨੇ ਲੋਕ ਨੇ ਮੇਰੀ ਗੱਲ ਦੀ ਕਿੰਨੀ ਕਦਰਾਂ ਡੁੱਬ ਗਏ ਠੀਕ ਹੈ ਬਸ ਕੌੜੀ ਜਿਸ ਜਨ ਤੇਰੀ ਭੁੱਖ ਹੈ ਤਿਸ ਦੁੱਖ ਨ ਵਿਆਪੈ ਜਿਨ ਜਨ ਗੁਰਮੁਖੀ ਬੁੱਝਿਆ ਸੋਹ ਚੋ ਕੁੰਡੀ ਜਪੈ ਜੇ ਜਨ ਤੇਰੀ ਭੁੱਖ ਹੈ ਜਿਹੜੇ ਜਨ ਦੇ ਅੰਦਰ ਜਿਹੜੇ ਗੁਰਮੁਖ ਦੇ ਅੰਦਰ ਤੇਰੇ ਦਰਸ਼ਨ ਦੀ ਭੁੱਖ ਹੈ ਤੇਰੀਓ ਭੁੱਖ ਹੈ ਮਾਇਆ ਦੀ ਭੁੱਖ ਨਹੀਂ ਹੈ ਤੇਰੀ ਭੁੱਖ ਹੈ ਜਿਹੜੇ ਮਿਲਣ ਦੀ ਭੁੱਖ ਹੈ ਤੇਰੇ ਦਰਸ਼ਨ ਦੀ ਭੁੱਖ ਹੈ ਇਸੋ ਦੁੱਖ ਨੂੰ ਵਿਆਪ ਹੈ ਉਹਨੂੰ ਦੁੱਖ ਵਿਆਪਦਾ ਹੀ ਨਹੀਂ ਕੋਈ ਉਹਨੂੰ ਨਹੀਂ ਦੁੱਖ ਲੱਗਦਾ ਕੋਈ ਜਿਨ ਜਨ ਗੁਰਮੁਖ 부ਝਿਆ ਜਿਨ੍ਹਾਂ ਗੁਰਮੁਖਾਂ ਨੇ 부ਝ ਲਿਆ ਸੋਚੋ ਕੁੱਟੀ ਜਪ ਹੈ ਉਚਾਰਾਂ ਕੋਟਾਂ ਵਿੱਚ ਪ੍ਰਗਟ ਹੋ ਗਏ 14 ਕੋਟਾਂ ਨੇ ਉਹਨਾਂ ਦੀ ਗੱਲ ਪ੍ਰਗਟ ਹੋ ਗਈ 14 ਕੋਟਾਂ ਨੇ ਜਾਣ ਲਿਆ ਵੀ ਹਾਂ ਇਹਨਾਂ ਨੇ 부ਝ ਲਿਆ ਇਹਨਾਂ ਨੇ 부ਝ ਲਿਆ ਉਚਾਰਾਂ ਕੋਟਾਂ ਵਿੱਚ ਪ੍ਰਗਟ ਵੀ ਹੋ ਗਏ ਵੀ 부ਝ ਲਿਆ ਹਾਂਜੀ ਜੋ ਨਾਨਕ ਦੀ ਸਰਨੀ ਪਰੈ ਤਿਸ ਕੰਬਹਿ ਪਾਪੈ ਜਨਮ ਜਨਮ ਕੀ ਮਲ ਉਤਰੈ ਗੁਰ ਧੂੜੀ ਨਾਪੈ ਜੋ ਨਾਨਕ ਦੀ ਸ਼ਰਨ ਪੜੈ ਜਿਹੜੇ ਨਾਨਕ ਦੀ ਸ਼ਰਨ ਪੈ ਜਾਂਦੇ ਨੇ ਕਿਸ ਕੰਬਹਿ ਪਾਪੈ ਉਹਨਾਂ ਦੇ ਅੰਦਰਲੇ ਪਾਪ ਕੰਬ ਜਾਂਦੇ ਨੇ ਪਾਪ ਐਸੇ ਕੰਬਦੇ ਨੇ ਕੰਬ ਕੇ ਭੱਜ ਜਾਂਦੇ ਨੇ ਛੱਡ ਜਾਂਦੇ ਨੇ ਅੰਦਰੋਂ ਪਾਪ ਆਪ ਤਾਂ ਪਾਪ ਛੱਡ ਜਾਂਦੇ ਨੇ ਅੰਦਰੇ ਫਸਮੂ ਹੋ ਜਾਂਦੇ ਨਹੀਂ ਪਾਪ। ਫਸਮੂ ਹੋਣ ਤੋਂ ਡਰਦੇ ਪਾਪ ਭੱਜ ਜਾਂਦੇ ਨੇ। ਜਨਮ ਜਨਮ ਕੀ ਮਾਲ ਉਤਰ ਹੈ? ਗੁਰਧੂੜੀ। ਛੱਪਾ। ਜਨਮ ਜਨਮ ਦੀ ਉਹਨਾਂ ਦੀ ਮੈਲ ਉਤਰ ਜਾਂਦੀ ਹੈ। ਜਦੋਂ ਗਿਆਨ ਦੀ ਧੂੜ ਦੇ ਨਾਲ ਗੁਰਮਤਿ ਦੇ ਗਿਆਨ ਦੀ ਗੁਰਬਾਣੀ ਦੇ ਗਿਆਨ ਦੀ ਧੂੜ ਦੇ ਨਾਲ ਆਪਣੇ ਮਨ ਨੂੰ ਬਾਝ ਲੈਂਦੇ ਨੇ। ਮਨ ਨੂੰ ਸਾਫ਼ ਕਰ ਲੈਂਦੇ ਨੇ। ਹਾਂਜੀ। जिन हर भाणा मनन्या तिस शोक ना संतापै हर जीव तू सबना का मित है सब जान है अपै जेना जिन हर भाणा भाणा बनले यारका भाणा बनलेया ना संतापै ओना नु कोई शोक है ना कोई संताप है जीव तू सबना का मित्त है हर जीव ਤੂੰ ਜਵਨਾ ਦਾ ਮਿੱਤ ਹੈ ਸਭ ਜਾਣੈ ਆਪੇ اے ਹਰ ਜੀਓ ਤੂੰ ਸਾਰਿਆਂ ਦਾ ਬਿੱਤਰ ਹੈ ਤੂੰ ਸਭ ਕੁਝ ਜਾਣਦਾ ਆਪੇ ਤੂੰ ਤਾਂ ਸਭ ਕੁਝ ਜਾਣੀ ਜਾਣੈ ਤੈਨੂੰ ਤਾਂ ਕੋਈ ਦੱਸਣ ਦੀ ਲੋੜ ਹੀ ਨਹੀਂ ਹੈ ਕੌਣ ਬੁਰਾ ਹੈ ਕੌਣ ਭਲਾ ਹੈ ਕੌਣ ਚੰਗਾ ਕੌਣ ਨਹੀਂ ਚੰਗਾ ਕੌਣ ਦੁਖੀ ਹੈ ਕੌਣ ਸੁਖੀ ਹੈ ਤੂੰ ਸਭ ਜਾਣਦਾ ਠੀਕ ਹੈ ਜੀ ਐਸੀ ਸੋਭਾ ਜਨੈ ਕੀ जीवड हर प्रतापै सब अंतर जन वरताया हर जन ते जापै ऐसी शोभा जना की हर जन दी ऐसी शोभा हुंदी है जेसी हर दी शोभा हुंदी है हर हर जन दो एक हैं कोई हुंदे ने दो बे बे विचार कछ तो है जलते उपजे तरंगी दी उजली ऐसी शोभा जना की जीवड हर ਪ੍ਰਤਾਪ ਹੈ ਜਿੱਦਾਂ ਬਡਾ ਹਰ ਦਾ ਪ੍ਰਤਾਪ ਹੈ ਉਹ ਜਨਦੀ ਸੁਭਾ ਕੋਈ ਹਰ ਹੋਰ ਹਰ ਜਾਂਦੀ ਫਰਕੇ ਕੋਈ ਨਹੀਂ ਸਭ ਅੰਦਰ ਜਨ ਵਰਤਾਇਆ ਹਰ ਜਨ ਤੇ ਜਾਪੇ ਸਾਰਿਆਂ ਨੇ ਅੰਦਰ ਹੀ ਹਰ ਵਰਤਿਆ ਹੋਇਆ ਇਹ ਗੁਰਮਖੇ ਹਰ ਜਨ ਨਹੀਂ ਦੱਸਦਾ ਕੋਈ ਜਨ ਦੱਸਦਾ ਸਰਦਾਰ ਨੂੰ ਤਾਂ ਜਨ ਹੀ ਦੱਸਣਾ ਕੋਈ ਸਿੱਖ ਨਹੀਂ ਦੱਸਣਾ ਗੁਰਮਖ ਨਹੀਂ ਦੱਸਣਾ ਵੀ ਤੇਰੇ ਵੀ ਅੰਦਰ ਹੈਗਾ ਸਭ ਦੇ ਅੰਦਰ ਹੈ ਉਹ ਤੋਂ ਯਾਪਣਾ ਉਹ ਤੋਂ ਹੀ ਸਮਝ ਆਉਣੀ ਆ ਵੀ ਸਭ ਦੇ ਅੰਦਰ ਹੈ ਇਸ ਕਰਕੇ ਜਿਹੜਾ ਹਰ ਦਾ ਪ੍ਰਤਾਪ ਹੈ ਉਹ ਜਨ ਦੀ ਜਿਹੜੀ ਸੋਭਾ ਜਾਂਦੇ ਕੀਤੀ ਹੈ ਉਹ ਹਰ ਦੇ ਪ੍ਰਤਾਪ ਦੀ ਉਹ ਸੋਭਾ ਕੀਤੀ ਹੈ ਹਰ ਜਨ ਦੀ ਕੀਤੀ ਹੋਈ ਸੋਭਾ ਹਰ ਪ੍ਰਤਾਪ ਹੁੰਦੀ ਹੈ ਇਸ ਕਰਕੇ ਉਹ ਸੋਭਾ ਤੋਂ ਹੀ ਹਰ ਸਭ ਦੇ ਅੰਦਰ ਹੈ ਇਹਦਾ ਵਿਸ਼ਵਾਸ ਸਭ ਨੂੰ ਹੋਣਾ ਹੈ ਠੀਕ ਹੈ ਜੀ ਇੱਥੇ 8ਵੀਂ ਪੌੜੀ ਦੀ ਸਮਾਪਤੀ ਹੈ ਜੀ